हां जी पीस भी जोड कर जोड जिस मन कर मन नु एक करके कर एक करके जिने एक कर लिया जोड लिया सत्त स्वरूप हो गया ओ अच्छा जी अपने आप नु सत्त कर लिया ਇਹ ਆਦ ਸੱਚ ਵਾਲਾ ਸੱਚ ਹੋ ਗਿਆ ਜੀ ਹਾਂ ਜੀ ਹਾਂ ਜੀ ਅੰਡਜ ਫੋਲ ਜੋੜ ਵਿਛੋੜ ਜਿਹੜਾ ਅੰਡਾ ਸੀ ਭਰਮ ਦਾ ਉਹ ਫੁੱਟ ਗਿਆ ਮਾਇਆ ਨਾਲ ਟੁੱਟ ਗਿਆ ਜੁੜ ਗਿਆ ਇੱਕ ਪਾਸੇ ਟੁੱਟ ਗਿਆ ਦੂਜੇ ਪਾਸੇ ਜੁੜ ਗਿਆ ਜਿਹੜਾ ਅੰਡਜ ਹੈ ਇਹਦਾ ਭਰਮ ਦਾ ਅੰਡਾ ਭ੍ਰਮੰਡ ਭਰਮ ਦਾ ਜਿਹੜਾ ਅੱਛਾ ਜੀ ਭਰਮ ਦਾਣ ਦਾ ਫੁੱਟ ਗਿਆ ਤੇ ਜੋੜੀ ਵਿਛੋੜੀ ਐ ਸਾਰੀ ਨਾਲੇ ਦੋ ਇੱਕ ਪਾਸੇ ਜੋੜਦਾ ਇੱਕ ਪਾਸੇ ਵਿਛੋੜਦਾ ਇਹ ਆ ਵਿਛੜਿਆ ਸੀ ਜਿਹੜੀ ਉਹ ਜੋੜ ਲਈ ਸੰਯੋਗ ਹੋ ਗਿਆ ਸੰਯੋਗ ਹੋ ਗਿਆ ਧਰਤੀ ਆਕਾਸ਼ ਕੀ ਬੈਸਣ ਕੋ ਥਾਉ ਰਾਤ ਦਿਨਸ ਕੀਏ ਪਾਉ ਪਾਉ ਕੋਈ ਹਲੇ ਵਾਸਤੇ ਧਰਤੀ ਆਕਾਸ਼ ਧਰਤੀ ਇਹਦੇ ਵਾਸਤੇ ਅਜਮੀਨ ਤੇਰੀ ਪਰਵਾਨ ਦੀ ਜੋਤ ਹੋ ਜਾਂਦਾ ਨਾ ਹਾਂ ਫਸਲਾਂ ਨੂੰ ਫੜ ਜਾਂਦਾ ਫਿਰ ਆਕਾਸ਼ ਇਹ ਧਰਤੀ ਹੈ ਇਹਦੇ ਵਾਸਤੇ ਆਕਾਸ਼ ਦੇ ਵਿੱਚ ਬੀਜ ਜੰਮਦਾ ਹੈ ਖਾਸੇ ਪੇੜ ਹੁੰਦਾ ਧਰਤੀ ਆਕਾਸ਼ ਕੀਏ ਬੈਸਣ ਕੋ ਥਾਉ ਬੈਸਣ ਨੂੰ ਥਾਉ ਇਹਦਾ ਅਕਾਸ਼ ਹੈ ਰਾਤ ਦਿਨਸ ਕੀਏ ਪਾਉ ਕੀਤੇ ਨੇ ਉਹਦੇ ਨਾਲ ਇਹਦਾ ਉਹਦੇ ਹੁਕਮ ਚ ਉਹਦਾ ਘਰ ਹੈ ਉਧਰ ਵਾਲੇ ਪ੍ਰੇਮ ਅੱਛਾ ਜੀ ਜਿਹਦੇ ਦਿਲਾਂ ਹੁਕਮ ਨੇ ਦਿਲਾਂਤ ਬਣਾਏ ਨੇ ਨਾ ਹੁਕਮਦਾਈ ਪਾਇਆ ਹੈ ਹੁਕਮਦਾਈ ਪ੍ਰੇਮ ਹੈ ਆਪਣੀ ਲੋੜ ਨੂੰ ਪੈ ਕੇ ਰਹਿਣਾ ਉਹਦੀ ਸਾਡੀ ਸਾਡਾ ਠੀਕ ਹੈ ਜੀ ਇਹ ਨਿਰਮਲ ਭੌ ਰੱਖਣਾ ਹੈ ਪਾਇਆ ਹਰ ਠੀਕ ਹੈ ਜੀ ਜਿਨ ਕੀਏ ਵੇਖਣ ਹਾਰਾ ਅਵਰਨਾ ਦੂਜਾ ਸਿਰਜਣਹਾਰਾ ਜਿਹੜਾ ਕੀਤੇ ਨੇ ਸਾਰੇ ਸੰਸਾਰ ਪੈਦਾ ਕੀਤਾ ਹੈ ਉਹਦੀ ਦੇਖਭਾਲ ਵੀ ਕਰ ਰਿਹਾ ਹੈ ਸਾਰਿਆਂ ਨੂੰ ਚੰਦ ਸੂਰਜ ਨੇ ਨਾ ਤੇ ਵੀ ਉਹਦੀ ਹੀ ਟਿਕਾਰ ਉਹ ਜਾਣਗੇ ਰਾਹੋਂ ਪੜ੍ਹ ਜਾਣਗੇ ਹੁਕਮ 'ਚ ਰੱਖਦਾ ਸਾਰਿਆਂ ਨੂੰ ਵੀ ਜੀਵਨ ਨੂੰ ਵੀ ਸਾਰਿਆਂ ਨੂੰ ਉਹਦੇ ਰੱਖਦਾ ਨਿਗ੍ਹਾ ਰੱਖਦਾ ਸਾਰੇ ਜੀ ਨਾ ਹੋ ਜਾ ਕੋਈ ਅਰ ਇਹਨੂੰ ਪੂਰੇ ਵੀ ਕਰਦਾ ਜਿਵੇਂ ਬਿਰਛਾ ਛੋਟਾ ਜਾਂ ਹੁੰਦਾ ਆਤਮਾ ਉਹਦੀ ਡਿਵੈਲਪਮੈਂਟ ਬੁੱਧੀ ਦੀ ਬਹੁਤ ਡਿਵੈਲਪਮੈਂਟ ਹੋ ਰਹੀ ਹੈ ਸਾਰਿਆਂ ਨੂੰ ਪੈਦਾ ਕਰਕੇ ਪੂਰੇ ਵੀ ਕਰਦਾ ਹੈ ਹਵਰ ਨਾ ਦੂਜਾ ਸਿਰਜਣਹਾਰ ਹੋਰ ਹੈ ਦਾ ਬ੍ਰਹਮ ਦੂਜਾ ਕੋਈ ਸਿਰਜਣਹਾਰ ਤੀਸਰੀ ਪੌੜੀ ਮਾ ਜੀ ਤੀਜੀ ਪੌੜੀ ਚੱਲਦੇ ਕ੍ਰਿਤਿਆ ਬ੍ਰਹਮਾ ਵਿਸ਼ਨ ਮਹੀਸ਼ਾ ਦੇਵੀ ਦੇਵ ਉਪਾਏ ਵਿਸਾ ਵੀ ਇਹ ਨੰਬਰ ਵੇਖਾਂਗੇ ਆ ਬ੍ਰਹਮਾ ਬਖੂਨ ਹੈ ਜਿਲੇ ਦੇ ਤ੍ਰੈਗੁਣੀ ਰਹਿ ਜੋ ਗੁਣੀ ਸਤੋ ਗੁਣੀ ਜਿਆਦਾ ਸੀ ਪਾਲਦੇ ਆ ਤਾਂ ਵਿਸ਼ਨੂ ਦਾ ਪੈਦਾ ਕਰਦੇ ਆ ਬ੍ਰਹਮਾ ਦਾ ਅਵਤਾਰ ਜਾਂ ਮਾਰਦੇ ਆ ਜੀਵਾਂ ਨੂੰ ਜੀਵ ਤੇ ਸ਼ਿਵ ਦਾ ਅਵਤਾਰ ਇਹ ਜੀਵ ਇਹਨੇ ਕੰਮ ਕਰਦੇ ਨੇ ਇਨਾਦਰ ਕਰ ਆ ਰਿਹਾ ਤੈਨੂੰ ਕਮ ਉਹ ਇਹ ਸਾਰਿਆਂ ਚ ਤਨ ਦੇ ਜੀਵਾਂ ਦੇ ਤ੍ਰੈਗੁਣੀ ਮਾਇਆ ਪ੍ਰਭਾਵਿਤ ਨੇ ਜੀ ਸਾਰੇ ਕਿ ਜ ਤ੍ਰਿਤਿਆ ਜਿਹੜਾ ਖਰੇ ਨਾਲੇ ਤ੍ਰੈਗੁਣੀ ਮਾਇਆ ਜੋੜ ਪਰ ਜਿਹੜੇ ਆਪਾਂ ਪੜਦੇ ਆ ਏਕਮਾਈ ਯੁਗਤੀ ਵਿਆਈ ਉਹ ਤਿੰਨ ਨਹੀਂ ਹੈ ਜੀ ਉਹ ਤਿੰਨ ਫਿਰ ਉਹ ਤਾਂ ਬਹੁਤ ਜੰਦਾ ਨੇ ਵਾਰੀ ਜਿੰਨੇ ਜੀ ਪਹਿਲਾਂ ਜਿੱਦੜੇ ਅਤ ਕਹਿਤਾ ਬ੍ਰਹਮਾ ਵਿਸ਼ਰਸ਼ਰੇ ਕਹਿੰਦਾ ਜੀ ਕਹਿੰਦਾ ਜੀ ਕਹਤਾ ਆਣਗੜ ਤੇ ਬ੍ਰਹਮਾ ਵਿਸ਼ਰੂ ਸਰ ਜੀ ਨੇ ਤੇ ਇੱਕ ਕਿਵੇਂ ਕਹਿ ਬ੍ਰਹਮਾ ਘੜਤ ਘੜੀਏ ਰੂਪ ਰੰਗ ਕੇ ਵੇਸ ਕਿਤੇ ਦਸ਼ਮ ਬਾਜ ਅੱਗੇ ਬਣਾਏ ਇੱਕ ਸ਼ਿਵ ਪਿਓ ਇੱਕ ਗਿਓ ਇੱਕ ਫੇਰ ਪਿਓ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਉਧਰ ਸਭ ਖਡਨ ਕੀਤਾ ਪਿਆ ਸ਼ੁਰਬਾਨੀ ਨੇ ਫਿਰ ਪੰਡਤ ਨੇ ਬਿਚਾਉਣਾ ਸੀ ਉਹਦੇ ਏਜੰਟ ਨਾਲ ਜੁੜੇ ਹੋਏ ਸੀ ਉਹਨਾਂ ਦੇ ਹੁਣ ਚਾਬੀ ਹੈ ਕੁੜਕਾ ਉਹਨਾਂ ਦੇ ਹੱਥ 'ਚ ਨਹੀਂ ਹੈ ਠੀਕ ਹੈ ਪਰ ਅਖਰ ਉਹਨਾਂ ਨੇ ਮਹੇਸ਼ ਵਰਤਿਆ ਸ਼ਿਵ ਨਹੀਂ ਹੈ ਨਹੀਂ ਨਹੀਂ ਨਹੀਂ ਸ਼ਿਵ ਹੋ ਰਿਹਾ ਕੋ ਕਹਿੰਦੇ ਸਨ ਆ ਬੜਾ ਹੋਊ ਦੇਵਤਾ ਨੇ ਬੋਲੇ ਸਾਡਾ ਬੜਾ ਹੈ ਕੋਈ ਗੱਲ ਨਹੀਂ ਮਾਨੂੰ ਕੀ ਦਰਾਜ ਜਿਹਨੋਂ ਜ਼ੋਰ ਦੇ ਬੜਾ ਔਰ ਉਹ ਫਰਾਂਸੀਸੀ ਦਾ ਨਿਯਮ ਪ੍ਰਵਾਂਸ਼ੀ ਦਾ ਜ਼ਰੂਰ ਕਾਹ ਕੋਲੇ ਆਪਰਾ ਸਰਪੰਚ ਬਣਾਉਣ ਦੀ ਕੋਈ ਗੱਲ ਨਹੀਂ ਹੁਣ ਕਹਿੰਦਾ ਵੀ ਸਾਡੇ ਪਿੰਡ ਦਾ ਰਾਸ਼ਟਰਪਤੀ ਹੈ ਜਿਹੜਾ ਪਿੰਡ ਦਾ ਸਰਪੰਚ ਹੈ ਉਹ ਰਾਸ਼ਟਰਪਤੀ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਨੇ ਜਿਹੜੇ ਦੇਵੀ ਦੇਵ ਨੇ ਇਹ ਵੇਸ ਜਿਹੜੇ ਸਰੀਰ ਨੇ ਦੇਵੀ ਦੇਵ ਨੇ ਅੰਦਰ ਰਹਿਵਾਂ ਅੰਤਰ ਦੇਵ ਨੇ ਜਾਣੇ ਹਨ ਉਹ ਦੇਤਾਰੀ ਦੇਵਤੇ ਹੀ ਨੇ ਸਾਰੇ ਸੁਭਾਨ ਕੋਈ ਦੇਵਤੇ ਦਾ ਸਾਹ ਕਿਸਦਾ ਇਹ ਮਤ ਪਾਵੈ ਇਹ ਕੀਮਤ ਪਾਵੈ ਇਹ ਉਤਕੀਮਤ ਪਾਵੈ ਕਿੰਨੀਆਂ ਜਾਤਾਂ ਨੇ ਕਿੰਨੀ ਜੋਤੀ ਹੈ ਜੋਤਾਂ ਕਿੰਨੀਆਂ ਨੇ ਜਾਤਾਂ ਕਿੰਨੀਆਂ ਨੇ ਸੰਸਾਰ ਦੇ ਵਿੱਚ ਦੇਖੋ ਜਿਹਨੇ ਬ੍ਰਹਸਪਤੀ ਹੈ ਕੀ ਹੈ ਇਹ ਆਦਮੀ ਦੇ ਵਸਦੇ ਨਹੀਂ ਇਹਦੀ ਗਿਣਤੀ ਕਰੇ ਠੀਕ ਹੈ ਜੀ ਪਤਾ ਕਿੰਨੀਆਂ ਨੇ ਉਹਦੀ ਕੀਮਤ ਪਾਈ ਹੋਈ ਹੈ ਉਹਨੂੰ ਗਿਆਨ ਹੈ ਕਿੰਨੀਆਂ ਨੇ ਉਹ ਜਿਹੜੀ ਗਿਣਤੀ ਤੇ ਬਾਹਰ ਨਹੀਂ ਸਾਡੀ ਗਿਣਤੀ ਉਹਨੇ ਤਾਂ ਸਾਰਿਆਂ ਨੂੰ ਖਾਣਾ ਪੀਣਾ ਦੇਣਾ ਉਹਦਾ ਖਰਚਾ ਪ੍ਰਬੰਧ ਕਰਨਾ ਉਹਨੂੰ ਤਾਂ ਪਤਾ ਹੈ ਕਿੰਨੇ ਨੇ ਸਾਨੂੰ ਜਿਹੜਾ ਜਾਣਦਾ ਜਿਹਨੇ ਫਾਇਦਾ ਕੀਤੇ ਨੇ ਉਹੀ ਭਰ ਕੇ ਪੂਰੇ ਕਰ ਰਿਹਾ ਸਾਰਿਆਂ ਨੂੰ ਜੇ ਹੁਣ ਗਿਣਤੀ ਦਾ ਪਤਾ ਨਾ ਹੋਵੇ ਤਾਂ ਭੁੱਲੇ ਪਰ ਕੇ ਨਹੀਂ ਪੂਰਾ ਕਰ ਨੂੰ ਭਰ ਕੇ ਪੂਰੇ ਕਰ ਰਿਹਾ ਸਾਰਿਆਂ ਜ ਗਿਆਨ ਉਦਾਰਿਆ ਸਾਰਿਆਂ ਦਾ ਕੋ ਗੁਰੂ ਜੋ ਹੈ ਆਪ ਸਾਰਿਆਂ ਦਾ ਗਿਆਨ ਵੀ ਸਾਰਿਆਂ ਨੂੰ ਦੇ ਰਿਹਾ ਹੋ ਰਹਾ ਮਹਤੂਰ ਹੁਣ ਸਾਰਿਆਂ ਨੂੰ ਇਹ ਪੂਰੇ ਕਰ ਰਿਹਾ ਹੈ ਤਾਂ ਕੀ ਤੋਂ ਦੂਰ ਹੈ ਕੀਤੇ ਨੇੜੇ ਹੈ ਸਾਰਿਆਂ ਦੇ ਅੰਦਰ ਸਾਰਿਆਂ ਦੇ ਸਿਰ ਤੇ ਹੀ ਹੱਥ ਸਾਰਿਆਂ ਦੇ ਅੰਦਰ ਵਰਾਜਮਾਨ ਸਾਰਿਆਂ ਦੇ ਮੂੰਹ ਜਿਹਾ ਪਾਰੇ ਗੁਰ ਕੀ ਤੇ ਦੂਰ ਕੀ ਨੇੜੇ ਕੀ ਤੋਂ ਹੈ ਹੋਕਮ ਸਰਵ ਵਿਆਪੀ ਹੈ ਹਕਮ ਨਾਲ ਜੰਮਣ ਮਾਰਨਾ ਹਕਮ ਨਾਲ ਪੂਰਾ ਹੋਣਾ हां जी जी ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ ਪੰਜਵੀਂ ਸ਼ੁਰੂ ਕਰਦੇ ਆ ਜੀ ਚੌਥ ਉਪਾਇ ਚਾਰੇ ਵੇਦਾ ਥਾਣੀ ਚਾਰੇ ਬਾਣੀ ਭੇਦਾ ਚੌਥੇ ਨੰਬਰ ਦੇ ਚਾਰ ਵੇਦ ਪੈਦਾ ਕੀਤੇ ਅੱਛਾ ਜੀ ਇਹ ਚਾਰ ਪੌੜੀਆਂ ਤਾਂ ਹੋ ਗਈਆਂ ਸ੍ਰਿਸ਼ਟੀ ਦੇ ਵਿੱਚ ਦੀਆਂ ਉਹ ਜੀ ਪੰਜਵੀਂ ਉਹ ਇੱਕੰਕਾਰ ਵੀ ਪਹਿਲਾਂ ਆਈ ਐ ਨਾ ਆ 5 9 ਆ ਉਹ ਗੱਲ ਚੌਥੇ ਦੀ ਕਰ ਰਹੀ ਹੈ ਗੱਲ ਚੌਥੇ ਨੰਬਰ ਤੇ ਆ ਰਹੀ ਪੌੜੀ ਆ ਨਾ ਇੱਕੰਕਾਰ ਵਾਲੀ ਠੀਕ ਹੈ ਜੀ ਇਹ ਵੀ ਗੱਲ ਦੱਸ ਦੇਣੀ ਜ਼ਰੂਰੀ ਸੀ ਹਾਂ ਜੀ ਫੇਰ ਚਾਰ ਬੇਦ ਪੈਦਾ ਕੀਤੇ ਚਾਰ ਪ੍ਰਕਾਰ ਦਾ ਗਿਆਨ ਚਾਰ ਸਥਿ ਤੇ ਜਿਵੇਂ ਉਹ ਰੂੜਾ ਹੋਰਾ ਬਾਟਕਾ ਫਿਰ ਤਾਂ ਇੰਨਾ ਗਿਆ ਆਦਮੀ ਨੂੰ ਗਿਆਨ ਸੀ ਵੀ ਭਾਈ ਨਿਵੇਂ ਹੋ ਜਾ ਨਿਵੇਂ ਹੋ ਜਾ ਏ ਲੋ ਬਸ ਉੱਥੇ ਕੇ ਰਹਿਣ ਲੱਗੇ ਸਾਰੇ ਉਹਨਾਂ ਕੀ ਕਹਿੰਦੇ ਫਿਰ ਨਹੀਂ ਭਈ ਉਹ ਕਹਾਂ ਲੱਗੇ ਆਂਦੋ ਰੋੜੇ ਨਾ ਬਣੂ ਵਾਰਦੇ ਤੇ ਰੋਕੋ ਸਭ ਨੂੰ ਕੋਈ ਸਾਨੂੰ ਤਾਂ ਵੀ ਇੰਨਾ ਹੀ ਕਹਿੰਦਾ ਇਹ ਤਾਂ ਹੋ ਕੇ ਰੋੜਾ ਹੋਣਾ ਦੋਸਤਾਂ ਦੇ ਵਿੱਚ ਇੱਕ ਤਾਂ ਨਿਵਾਣਾ ਹੋ ਕੇ ਰਹਿਣਾ ਤੇ ਕੋਈ ਕੀਮਤ ਨਹੀਂ ਸੀ ਇੱਕ ਦਾ ਰੋੜਾ ਹੋ ਦੋਸਤਾਂ ਦੇ ਵਿੱਚ ਹੈ ਸੰਤੀ ਦੁੱਖ ਲੈਣ ਵਾਲਾ ਦੂਈ ਸੰਸਾਲਾ ਰੋਡ ਨਹੀਂ ਮਾਣਉਦੋ ਖੇਚੰਗੀ ਐ ਫਿਰ ਇੱਕ ਕਰੋੜਾ ਠੀਕ ਆ ਦੂਆ ਰੋਡ ਗਲਤ ਵੀ ਆ ਰੋਡੇ ਤੇ ਗਲਤ ਰਖ ਵੀ ਆਉਂਦੇ ਨੇ ਸੰਸਾਲਾ ਰੋਡ ਨਹੀਂ ਉਹ ਤਾਂ ਗੱਲ ਠੀਕ ਐ ਰੋਣਾ ਚੁਬਦਾ ਪਰ ਜੇ ਉੱਟ ਕੇ ਅੱਖਾਂ ਚ ਪੈਂਦੀ ਐ ਫਿਰ ਵੜੀ ਐ ਇੱਕ ਗੋਣਾ ਵੀ ਉੱਡਾਈ ਐ ਫਿਰ ਪਾਣੀ ਤੇ ਆ ਗਏ ਕਹਿੰਦੇ ਵੀ ਪਾਣੀ ਖੇ ਜਿਹੜੀ ਅੱਖਾਂ ਚ ਛਿੱਟੇ ਮਾਰੇ ਆ ₹ ਉਹ ਕਹਿੰਦੇ ਪਾਣੀ ਠੀਕ ਹੈ ਇਹ ਗੁਣ ਪਾਣੀ ਦਾ ਪਰ ਪਾਣੀ ਜਦ ਤਪੜਿਆ ਠੰਡਾ ਹੋ ਜਾਂਦਾ ਜਾਂ ਜੱਫਾ ਵੀ ਹੋਣਾ ਕਰਦਾ ਹੈ ਦੂਜੇ ਦੀ ਮੱਤ ਕਬੂਲ ਕਰ ਲੂਗਾ ਉਹ ਕਹਿੰਦੇ ਹਰ ਜਨ ਜੈਸਾ ਚਾਹੀਏ ਜੈਸਾ ਹਰੀ ਹੋਏ ਤਾਂ ਉੱਥੇ ਤੇ ਆ ਕੇ ਫੈਸਲਾ ਹੋਏ ਚਾਰੇ ਵੇਦਾਂ ਮੇਰਾ ਨਾਲ ਨਹੀਂ ਸੀ ਬਣਦੀ ਚੌਥ ਪਾਏ ਚਾਰੇ ਵੇਦਾਂ ਚਾਰੇ ਵੇਦਾਂ ਬੇਦ ਦਾ ਅੱਛਾ ਜੀ ਬੇਦਾਂ ਕਾਹਾਂਗੇ ਬੇਦਾਂ ਨੇ ਪੈਦਾ ਕੀਤੇ ਫਿਰ ਤਾਂ ਹੋ ਜੂ ਚਾਰੇ ਭੇਦ ਪੈਦਾ ਕੀਤੇ ਚਾਰ ਪ੍ਰਕਾਰ ਦੀਆਂ ਸ੍ਰੇਜਾਂ ਪੈਦਾ ਕੀਤੀ ਤੇ ਤਿੰਨ ਮੰਜਲਾ ਮਾਇਆ ਨੇ ਚੌਥੀ ਮੰਜਲ ਤੋਂ ਭਰੇ ਬਾਣੀ ਭੇਦ ਚਾਰ ਖਾਣੀਆਂ ਠੀਕ ਹੈ ਵਿਚਾਰ ਦੇ ਬਾਣੀਆਂ ਵਿਚਾਰੇ ਨੇ ਚਾਰੇ ਖਾਣੀਆਂ ਚਾਰੇ ਬਾਣੀਆਂ ਦਾ ਭੇਦ ਚਾਰ ਵੇਦਾਂ ਚਾਰ ਪ੍ਰਕਾਰ ਦੇ ਗਿਆਨ ਦੇ ਗਿਆਨ ਚਾਰੇ ਖਾਣੀਆਂ ਦਾ ਭੇਦ ਦਾ ਚਾਰੇ ਬਾਣੀਆਂ ਦਾ ਭੇਦ ਬਾਣੀਆਂ ਵੀ ਕਹਿੰਦੇ ਪਰ ਆ ਪਸੰਤੀ ਮੱਧਮਾ ਔਰ ਬੈਖੜੀ ਚਾਰ ਬਾਣੀਆਂ ਨੇ ਚਾਰ ਖਾਣੀਆਂ ਦੀ ਉਹ ਪਿਛੇ ਨਾ ਹੈ ਕਿ ਗਿਆਨ ਦੀ ਪੜਾਈ ਸ਼ੁਰੂ ਕਰਾਈ ਸਾਰਾ ਸੰਸਾਰ ਰਜਾ ਚਾਰ ਚੌਥੀ ਬਾਣੀ ਹੈ ਜਿਹੜੀ ਤਰਤੀ ਬਾਣੀ ਹਨ ਜਦ ਉਹ ਆਈ ਮੱਖਣ ਦੁੱਧ ਬਣਾ ਰਹੀ ਆ ਉਹਦਾ ਫਿਰ ਬੋਲ ਕੇ ਜਦ ਬੋਲ ਰਹੀ ਆ ajo ਮੂੰਹ ਦੇ ਵਿੱਚ ਹੀ ਇਹ ਪਸੰਤੀ ਹਵਾ ਵਿੱਚ ਘਸ ਬਾਹਰ ਨਿਕਲੀ ਤੇ ਧੂਏ ਬਣ ਗਈ ਕਹਿਣ ਵਾਲੇ ਸੁਣਨ ਵਾਲੇ ਵਿੱਚ ਮਾਦਮਾ ਬਣ ਗਈ ਨਾ ਜਦ ਉਹ ਮਾਦਮਾ ਹੋ ਗਈ ਜਿਹੜੀ ਉਹਨੇ ਵਿਚਾਰ ਉਹ ਸਮਝਿਆ ਉਹਦੇ ਵਿੱਚ ਉਹ ਵੈਖਰੀ ਬਣ ਗਈ ਉਹਨੂੰ ਸੋਝੀ ਆਈ ਉਹ ਵੈਖਰੀ ਆ ਬੱਕਿਆ ਨੂੰ ਗੁਰਬਾਣੀ ਨੂੰ ਆਪਾਂ ਕਿਹੜੀ ਬਾਣੀ ਕਹਾਂਗੇ ਫਿਰ ਗੁਰਬਾਣੀ ਦੇ ਚ ਤਿੰਨ ਨੇ ਅੱਛਾ ਜੀ ਤਾਂ ਸੰਤਿ ਨਹੀਂ ਸੀ ਜਦੋਂ ਮੂਹ ਜੀ ਪ ਸੰਤਿ ਦੀ ਬਾਹਰ ਆਈ ਤਾਂ ਮਦਮ ਬਣ ਗਈ ਹੋਣੀ ਵਿਚਾਰਾਂਗੇ ਬੈਖਰੀ ਬਣ ਉਹੀ ਨਿਕਲਦਾ ਨਾਮ ਪਾਇਆ ਸੀ ਨਾਮ ਹੀ ਨਿਕਲਣਾ ਇਹ ਗੁਰਬਾਣੀ ਹਾਂ ਮਾਨੂੰ ਸਮਾਇਆ ਜਿਹੜਾ ਨਾ ਹਾਂ ਉਹੀ ਕਰਨੀ ਵਿਚਾਰ ਕੇ ਬੈਖਰੀ ਹੈ ਵਿਚਾਰਨ ਤੋਂ ਬਾਅਦ ਜੋ ਪ੍ਰਾਪਤੀ ਹੈ ਉਹ ਬੈਖਰੀ ਹੈ ਜੋ ਸਮਝ ਆਈ ਉਹ ਬੈਖਰੀ ਹੈ ਪਾ ਜਿਹੜੀ ਪੜਾ ਹੈਗੀ ਆ ਉਹ ਬਾਣੀ ਗੁਰੂ ਸੀ ਉਹਦਾ ਧੁਰਕੀ ਬਾਣੀ ਠੀਕ ਹੈ ਜੀ ਉਹ ਬਿਨਾਂ ਬਿਨਾਂ ਕਰਨਾ ਤਾਂ ਸੁਣਦੀ ਹੈ ਜੀ ਤੇ ਆਉਟ ਆਫ ਬੁੱਧੀ ਤੋਂ ਪੜਈ ਆ ਫਿਰ ਠੀਕ ਹੈ ਉਹ ਆਗਮ ਦੀ ਗੱਲ ਹੈ ਜੀ ਆਗਮ ਕੋਚ ਨਾ ਠੀਕ ਹੈ ਜੀ ਆਹ ਤੇ ਦੱਸਾ ਹਟ ਤੀਨ ਉਪਾਏ ਤੋ ਜਿਸ ਆਪ ਬੁਝਾਈ ਦੇਖੋ ਪ੍ਰਾਣ ਕਰਤਾ ਹੋਏ ਆ ਇਹ ਤਾਂ ਹੀ ਕਰਨਗੇ ਇਹ ਗੱਲ ਹੈ ਕਰਤਾ 8 ਅਸ਼ਟਿਕ ਹੈ ਅਸ਼ਟ ਸਿੰਧੀ ਸਭ ਗੁੱਦ ਕੋਈ 8 ਜਿਹੜੇ ਉਮਰਵੰਤ ਜਾਇਏ ਨੇ ਓਮਕਾਰ ਸਤਨਾਮ ਕਰਤਾ ਪੁਰਖ 8 ਜਿਹੜੇ ਨੇ ਨਾ ਜਿਹੜਾ ਅੰਦਰ ਸਰੀਰ 8 ਧਾਤੂ ਦਾ ਅਸ਼ਟ ਹੋ ਗਿਆ 10ਾ ਹੋ ਗਿਆ 10 ਵਾਰੇ ਦਾ ਬਾਹਰਲਾ ਸਰੀਰ ਹੋ ਗਿਆ 6 ਗਿਆਨੰਦਰੇ ਹੋ ਗਏ ਨੇ ਇਹ ਤਾਂ ਪੁਰਾਣਾ ਦੀ ਗੱਲ ਪੁਰਾਣਾ ਨੇ ਤਾਂ ਵਧੀ ਘੇੜੇ ਪਾਇਆ ਇਹ ਭੇਦ ਦੀ ਗੱਲ ਮੈਂ ਭੇਦ ਨੇ ਪੁਰਾਣੇ ਦੂਏ ਕਰਦੇ ਇਹਨਾਂ ਨੇ ਇਹ ਤਾਂ ਗੱਲ ਨਹੀਂ ਗਈ ਠੀਕ ਹੈ ਇਹ 18 ਕਹਿ ਦਿੰਦੇ ਇਹਨਾਂ ਨੂੰ ਦਸਾ ਕਹਿ ਦਿੰਨੇ ਇਹ ਕਹਿ ਦਿੰਦੇ ਫਿਰੋ ਠੀਕ ਹੈ ਜੀ 18 ਹੈ ਜਾਂ ਅੱਖਰੋਂ ਦਾ ਆਪਣੇ ਸ਼ਬਦ ਵਰਤੇ ਇਹਨਾਂ ਨੇ ਸਮਝ ਆਇਆ ਹਾਂ ਜੋ ਸ਼ਰੀਰ ਫੰਦਲਾ ਸਰੀਰ ਉਹ ਅੱਠ ਤਾਤੂ ਦਾ ਬਾਹਲਾ 10 ਸਰੀਰ ਹੈ ਤੇ ਖੱਟ ਤੀਨ ਉਪਾਦ ਉਹ 6 ਉਹਦੇ ਗਿਆਨੰਦਰੇ ਨੇ ਪੰਜ ਤਾਂ ਉਹਦੇ ਗਿਆਨੰਦਰੇ ਹੈ ਉਹ ਅੱਖਾਂ ਨੱਕ ਕੰਨ ਮੂੰਹ ਚਵੜੀ ਦਬਰਸ਼ ਕਮੜੀ ਦਾ ਹੁੰਦਾ ਬ੍ਰੇਨ ਦਿਮਾਗ ਸਿੱਧੀ ਹੋ ਛੇ ਨੇ ਛੇ ਘਰ ਛੇ ਗੁਰ ਛੇ ਉਪਦੇ ਇਹਾਂ ਨੇ ਅਰਥੇ ਬਦਲੇ ਹੋਰ ਕੀ ਕੀਤਾ ਇਤੇ ਘਰ ਬਣਿ ਗਏ ਆ ਜਮੀਨ ਖਰਤੇ ਜਿਹੜੇ ਪਹਿਲਾਂ ਦੇ ਕੀਤੇ ਤੇ ਇਹ ਇਹ ਨਾਲੇ ਹੱਥ ਨੇ ਬੁੱਝਣ ਉਹ ਨੇ ਜੀਵ ਦੇ ਰਹਿਣ ਵਾਲੇ ਅੱਛਾ ਜੀ ਹੁਣ ਜੀਵ ਦਾ ਅਠ ਦਾ ਸਰੀਰ ਹੈ ਤਿੰਨ ਰੋਗ ਜੀਵ ਰਹਿੰਦਾ ਅੱਠ ਤਤੂ ਦੇ ਸਰੀਰ ਦਾ ਦੋ ਲੋਕਾਂ ਵਿੱਚ ਦੁਆਰ ਹੈ ਨਾ ਮਾਤ ਲੋਕਾਂ ਲੋਕਾਂ ਦੇ ਵਿੱਚ ਸ੍ਰੀ ਰਣ ਨਾਲ ਦੋ ਨੇ ਮੈਨੂੰ ਦੁਬਾਰਾ ਦੱਸੋ ਅਸ਼ਟ ਵਾਲਾ ਜਿਹੜਾ ਹੈਗਾ ਫਿਰ ਸੰਦਲਾ ਸ਼ਰੀਰ ਹੈ ਇਹ ਚ ਇੱਕ ਹੈ ਠੀਕ ਹੈ ਜੀ ਜਿਹੜਾ ਦਸਾਂ ਵਾਲਾ ਇਹ ਫਿਰ ਦੁਆਪਰ ਚ ਮਿਲਿਆ ਜੀ ਇਹ ਦੁਆਪਰ ਚ ਮਿਲਿਆ ਕਰ ਜੁਗ ਠੀਕ ਹੈ ਤੇ ਜਿਹੜੇ ਇਹਦੇ ਨਾਲ ਫਿਰ ਖੱਟ ਜੁੜ ਗਏ ਜੁੜ ਗਏ ਹਨ ਇਹ ਗਿਆਨਿੰਦਰ ਹੀ ਜੁੜ ਕੇ ਵਿਚਾਰ ਚੋਂ ਵੀ ਤਾਂ ਸਾਨੂੰ ਗਿਆਨ ਪੈਦਾ ਹੁੰਦਾ ਹੈ ਮਿਲਦਾ ਹੈ ਕਿ ਪੰਜ ਤਾਂ ਇਹਨਾਂ ਵਾਲੇ ਗਿਆਨਿੰਦਰ ਇੱਕ ਬੁੱਧੀ ਹੋ ਗਈ ਦੱਸੋ ਤਿੰਨ ਲੋਕ ਤਿੰਨ ਲੋਕਾਂ ਦੇ ਜੀਵ ਰਹੇ ਨੇ ਤਿੰਨ ਲੋਕ ਕਿਹੜੇ ਕਿਹੜੇ ਇੱਕ ਤਾਂ ਹੰਸ ਹੁੰਦਾ ਪੰਗੇ ਹੰਸਾ ਖੇਲਾ ਦੂਸਰਾ ਦੂਸਰਾ ਘਰ ਬੋ ਕਰ ਜੂਗਾ ਤੀਜਾ ਠੀਕ ਹੈ ਜੀ ਨਾਲੇ ਇੱਥੇ 3 ਲਿਖਿਆ ਜੀ ਹੈ ਨਾ ਅੱਖਰ ਇਹ 3 ਲਿਖਿਆ 3 ਹੀ ਲਿਖਿਆ ਦਾ ਮਤਲਬ 3 ਹੈ ਜਿੱਥੇ ਨੇ ਹੋਣਾ ਸਾਰੀ ਗੁਰਬਾਣੀ ਚ ਠੀਕ ਹੈ ਵਾਸਾ ਪ੍ਰਣਵਤ ਨਾਨਕ ਹਮ ਤਾਕੇ ਦਾਸਾ 3 ਜਿਹੜੇ ਲੋਕ ਨੇ ਜਦੋਂ ਇਹ 3 ਲੋਕ ਸਮਾ ਨੇ ਇਹਦੇ ਹਿਰਦੇ ਚ ਹੂੰ ਹੂੰ ਤਨ ਤੇਰੇ ਭਵਣ ਵਿੱਚ ਰਹਿ ਆ ਸਮਾਇ ਕਬੀਰ ਕਹਿ ਰਿਹਾ ਉਹ ਵੀ ਦਿੱਤੀ ਗੋੜੀ ਚ ਕਹਿ ਰਿਹਾ ਜਿਹੜਾ ਤਨ ਇਹਦਾ ਅੰਦਰਲਾ ਸਰੀਰ ਹੈ ਇਹ ਕਿੰਨਾ ਭਵਣ ਸਮਾਇਆ ਰਹਿੰਦਾ ਕਿੰਨਾ ਭਵਣ ਚ ਚੱਕਰ ਕੱਟੀ ਜਾਂਦਾ ਮਾਇਆ ਦੇ ਵਿੱਚ ਜਦ ਤੇਰੇ ਭਵਣ ਤੋਂ ਭਣ ਤਨ ਮਾਇਆ ਜਦ ਤਿੰਨੇ ਭਵਣ ਜਿਹੜੇ ਨੇ ਤਿੰਨੇ ਲੋਕ ਦੇ ਉਹਨਾਂ ਨੂੰ ਹਿਰਦਾ ਵੱਡਾ ਹੋ ਜਾਂਦਾ ਤਿੰਨੇ ਲੋਕ ਇਹਦੇ ਅੰਦਰ ਸਮਾ ਜਾਂਦੇ ਨੇ ਭਨ ਲਾਂਡਾ ਫੁੱਟ ਜਾਂਦਾ ਤਬ ਪਉ ਭਾਨ ਭਰੂਸ ਆਵਾ ਫੇਰ ਇਹ ਸੱਚ ਹਾਲੇ ਚਲਾ ਜਾਂਦਾ ਫੇ ਤਿੰਨ ਲੋਕ ਅੰਦਰ ਰਹਿ ਜਾਂਦੇ ਨੇ ਇਹਦੇ ਇਹ ਬਾਹਰ ਕੋਠੇ ਚ ਜਾਂਦਾ ਤੇ ਲੋਕ ਅੰਦਰ ਤੇ ਜੇ ਲੋਕ ਛੋਟੇ ਹੁੰਦੇ ਨੇ ਜਾਂਦਾ ਤਾਂ ਰਹਿ ਜਾਂਦਾ ਇਹਦੇ ਆਪਸਾਦਰ ਵੱਡਾ ਉਹ ਬਾਹਰ ਨਿਕਲ ਜਾਂਦਾ ਇਹ ਸੁਖਸਾਦਰ ਦਾ ਵਾਸੀ ਹੋ ਜਾਂਦਾ ਆਪਸਾਦਰ ਦੇ ਅੰਦਰ ਹੀ ਲੋਕ ਇਹਦੇ ਵਿੱਚ ਸਮਾ ਜਾਂਦੇ ਨੇ ਠੀਕ ਹੈ ਪ੍ਰਣਵਤ ਨਾਨਕ ਹਮਤਾ ਕੇ ਦਾਸ ਆ ਮੈਂ ਜਦੋਂ ਜਿਹਦੇ ਇਹ ਹੋ ਜਾਂਦਾ ਫਿਰ ਨਾਨਕ ਹੈ ਨਾ ਮੈਂ ਬੇਨਤੀ ਕਰਨ ਉਹਦਾ ਤਾਂ ਮੈਂ ਫਿਰ ਦਾਸ ਆ ਜਿਹਦੀ ਇਹ ਅਵਸਥਾ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਸਮਾਪਤ